ਸ਼ਲੋਕ ਮਹੱਲਾ ਤੀਜਾ ਜਿੱਚਰ ਏ ਮਨ ਲਹਿਰੀ ਵਿੱਚ ਹੈ ਹੋਮੇ ਬਹੁਤ ਅਹੰਕਾਰ ਸ਼ਬਦੈ ਸਵਾਦਨਾ ਆਵਈ ਨਾਮ ਨਾਲ ਲੱਗੈ ਪਿਆਰ ਜਿੱਚਰੇ ਵਣ ਲਹਿਰੀ ਵਿੱਚ ਹੈ ਜਿੰਨਾ ਚਿਰੇ ਸਮੰਦ ਦੇ ਵਿੱਚ ਲਹਿੜਾਂ ਉੱਠਦੀਆਂ ਨੇ ਰੰਗਾਂ ਉੱਠਦੀਆਂ ਨੇ ਮਾਇਆ ਦੀਆਂ ਇੱਛਾਵਾਂ ਉੱਠਦੀਆਂ ਨੇ ਇੱਛਾਵਾਂ ਹੀ ਲਹਿਰਾਂ ਨੇ ਹੋਮੇ ਬਹੁਤ ਅਹੰਕਾਰ ਇਹਨੂੰ ਹੁੰਦੇ ਹਨ ਮੇਰੇ ਅਹੰਕਾਰ ਵੀ ਬਹੁਤ ਹੁੰਦੇ ਵੀ ਬਹੁਤ ਉਹ ਮੈਂ ਕਰ ਬਹੁਤ ਆਉਂਦਾ ਉਹ ਨਾ ਕਿਤੇ ਵਿੱਚ ਸ਼ਬਦ ਦੇ ਸਾਧਨ ਆ ਵੀ ਇਹਨੂੰ ਉਹ ਨਾ ਸਿਰ ਆ ਜਿਹੜੇ ਨੇ ਸ਼ਬਦ ਉਪਦੇਸ਼ ਇਹਦਾ ਵਿੱਚੋਂ ਆਪ ਦਾ ਸਵਾਦ ਲੱਗੇ ਪਿਆਰ ਨਾ ਇਹੋ ਨਾਮ ਨਾਲ ਹੁਕਮ ਨਾਲ ਪਿਆਰ ਲੱਗਦਾ ਕੁਰਬਾਨੀ ਦੇ ਗਿਆਨ ਨਾਲ ਪਿਆਰ ਨਹੀਂ ਲੱਗਦਾ ਸੱਚ ਮੰਨਦਾ ਹੀ ਨਹੀਂ ਹੈ ਸੇਵਾ ਥਾਇਨਾ ਪਵਈ ਦੇਸ खप ਕਪ ਕਪ ਹੋਏ ਖਵਾਰ ਨਾਨਕ ਸੇਵਕ ਸੋਈ ਆਖੀਆਂ ਜੋ ਸਿਰ ਧਰੇ ਉਤਾਰ ਦੇਵਾ ਥਾਣਾ ਪਾ ਵੀ ਉਹਦੀ ਸੇਵਾ ਵੀ ਨਹੀਂ ਸਾ ਪੈਂਦੀ ਹੰਕਾਰੀ ਨਹੀਂ ਫਿਰ ਜਿੰਨੀ ਮਰਜੀ ਬਾਣੀ ਪੜੀ ਜਾਵੇ ਸੱਚਖੰਡ ਜੋਦੀ ਕੋਡੀ ਦੀ ਜੂਤ ਪਹਿਲੀ ਜੇ ਗਿਆਨ ਉਹਦੀ ਨਿਰਮਲ ਬੁੱਧ ਹੁੰਦੀ ਹੈ ਨਾ ਬਨ ਜੇ ਮਨ ਦੀ ਨਿਰਮਲ ਹੁੰਦਾ ਥਾਹਾਂ ਹੀ ਪੈਂਦੀ ਆਪੇ ਹੀ ਦੇਖ ਲੈਣ ਕਿਹੜਾ ਸੱਚਖੰਡ ਦਾ ਤਾਂ ਇੱਕ ਗੱਲ ਹੀ ਹੈ ਆਪਣਾ ਵਾਜੇ ਥੋੜਾ ਸ਼ੁੱਧ ਹੋ ਰਿਹਾ ਨਹੀਂ ਹੋ ਰਿਹਾ ਬੋਟੇ ਕਰਿਆ ਨਹੀਂ ਕਰਿਆ ਆਪੇ ਪਤਾ ਗਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਧਰਿਓ ਤਾਂ ਸੇਵਕ ਤਾਂ ਉਹੀ ਹੈ ਜਿਹੜਾ ਬੰਦੇ ਆਪਣੇ ਮਨ ਨੂੰ ਗੁਰੂ ਦੇ ਸਤਗੁਰ ਦੇ ਚਰਨਾਂ ਦੇ ਅੰਦਰ ਉਤਾਰ ਜੇ ਧਰ ਦੋ ਸਿਰ ਇੱਥੇ ਮਾਣੇ ਵਰਗੀ ਜੈਸੇ ਝੋਪੀਏ ਮਾਣੇ ਜਿਹੜਾ ਲੈ ਕੇ ਦੇ ਚਰਨਾਂ ਦੇ ਰੱਖਦਾ ਤਾਂ ਹੀ ਸੇਵਕ ਬਣ ਸਕਦਾ ਵਰਨਾ ਸੇਵਕ ਨਹੀਂ ਠੀਕ ਹੈ ਤਾਂ ਕਿ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਠੀਕ ਹੈ ਜੀ ਕੋਈ ਆ ਬਾਹਰਲਾ ਸਿਰ ਨਹੀਂ ਕਿਤੇ ਉਤਾਰ ਕੇ ਧਰ ਦੇਣਾ ਫਿਰ ਕਾ ਸਾਰੀ ਸਾਰੀ ਨੇ ਤੇ ਇਹੀ ਦਸਮ ਬਾਦਸ਼ਾਹ ਨੇ ਸਿਰ ਮੰਗੇ ਸੀ ਉੱਥੇ ਹਾਂ ਜੀ ਕਿ ਕਿਹਨੇ ਮਨ ਸੌਪਤਾ ਦੂਏ ਦਾ ਕਹਾ ਕੇ ਕਰਦੇ ਉਹ ਤਾਂ ਕਹਿੰਦੇ ਵੀ ਉਹਨਾਂ ਦੇ ਸਿਰ ਵੱਢ ਦਿੱਤੇ ਸੀ ਕੁਝ ਕਹਾਣੀਆਂ ਤਾਂ ਆਇਆ ਵੀ ਉਹ ਇੱਕ ਦੂਏ ਨੂੰ ਸੀ ਜੀ ਆਹ ਦਾ ਵੱਡੇ ਤੇ ਜੋੜਨ ਵਾਲੇ ਤੇ ਜਿਹੜੇ ਦੱਸਦੇ ਨੇ ਕਿ ਜੋੜੇ ਦਾ ਅਸੀਂ ਸੀ ਉਹ ਤਾਂ ਵੱਢਣੇ ਜਾਣਦੇ ਤੇ ਵੱਢਦੇ ਬਸ ਉਹਨਾਂ ਨੇ ਹਾਂ ਗੁਰਪ੍ਰਸਾਦ ਦਾ ਦਾਸ ਹੈ ਦਾਸ ਗੁਰਪ੍ਰਸਾਦ ਫਤੇਹਾਲਸ ਇਹ ਮਹਾਪੁਰਸ਼ ਨੇ ਮਹਾਪੁਰ ਚੋੜ ਸਕਦੇ ਨੇ ਦਾਸ ਤਾਂ ਜੋੜ ਨਹੀਂ ਸਕਦਾ ਕੱਢ ਕੇ ਵੱਢ ਸਕਦਾ ਜੋੜ ਨਹੀਂ ਸਕਦਾ ਹਾਂਜੀ ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖਿਆ ਉਰਤਾਰ ਜੇ ਸਤਿਗੁਰ ਦਾ ਭਾਣਾ ਮੰਨ ਕੇ ਕੋਈ ਮੰਨ ਲਵੇ ਆਏ ਗੁਰ ਸ਼ਬਦ ਹੈ ਗੁਰ ਸਤਿਗੁਰ ਦਾ ਉਪਦੇਸ਼ ਹੈ ਇਹ ਨੂੰ ਧਾਰਨ ਕਰਕੇ ਰੱਖੇ ਇਹ ਕੀ ਫਾਰਮੂਲਾ ਜਿਹੜਾ ਸਿਰ ਉਤਾਰ ਦੇ ਕੇ ਰੱਖ ਦਿੰਦਾ ਹੈ ਉਹ ਫਿਰ ਸਾਧੂ ਦਾ ਪਾਣ ਬਣ ਲੈਂਦਾ ਹੈ ਉਹਦੇ ਸ਼ਬਦ ਦੇ ਵਿੱਚ ਪਸ ਜਾਂਦਾ ਜਾਂ ਫਿਰ ਆਹੰਕਾਰ ਰਹਿੰਦਾ ਹੈ ਤਹੁਬੇ ਰਹਿੰਦੀ ਹੈ ਬਾਹਰ ਉਹ ਨਾ ਪ੍ਰਗਟ ਹੋ ਜਾਂਦਾ ਉੱਤੇ ਨਾ ਕੋਈ आपत ਗਵਾਵੈ ਦੇਖੋ ਉਹਨਾਂ ਜਿਹੜੀ ਜਪ ਤਪ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਆਂ ਇੱਕ ਤਾਂ ਉਹ ਹੈ ਕਰਦੇ ਸੀ ਲੋਕ ਪਹਿਲਾਂ ਵੀ ਉਹਨਾਂ ਨੂੰ ਇਹ ਕਹੀ ਸੀ ਇਹ ਗੱਲ ਪਰ ਉਹੀ ਕੰਮ ਫੇਰ ਕਰੀ ਜਾਂਦੇ ਨੇ ਹਟੇ ਨਹੀਂ ਗੁਰਬਾਨੀ ਆਪਣੀ ਜਗ੍ਹਾ ਲਈ ਗਈ ਸੋ ਜਪ ਤਪ ਸੇਵਾ ਚੱਕਦੀ ਉਹੀ ਜਪਾ ਉਹੀ ਇਹਨੂੰ ਗੁਰਬਾਣੀ ਪ੍ਰਮਾਣ ਕਰਦੀ ਹੈ ਸਰਟੀਫਾਈ ਕਰਦੀ ਹੈ ਉਹ ਹੈ ਪਾਕੀ ਸਭ ਬੇਕਾਰ ਹੈ ਖਸਮੇ ਭਾਵਾ ਜੋ ਖਸਮੇ ਪੌਂਦੇ ਉਹ ਲਿਖਿਆ ਹੋਇਆ ਗੁਰਬਾਣੀ ਚ ਜਦ ਨਹੀਂ ਪੌਂਦਾ ਉਹ ਵੀ ਲਿਖਿਆ ਹੈ ਜੋ ਖਸਮੇ ਭਾਵਾ ਆਪੇ ਬਖਸ਼ੇ ਦੇਲੈ ਆਪਤ ਤਵਾਵਾ ਆਪ ਤਖਸ਼ੇ ਹੋ ਜਾਂਦੀ ਹੈ ਫਿਰ ਬਖਸ਼ੇ ਦੇ ਪਿਛਲੇ ਉਹ ਆਪਣੇ ਨਾਲ ਬੁਲਾ ਲੈਂਦਾ ਆਪਾਂ ਤੇ ਜਿਹੜੀ ਉਹਦੀ ਦੇ ਪਤੀ ਹੋਈ ਹੋਈ ਜਾਂਦੇ ਪ੍ਰਤੀਤੀ ਹੋਈ ਹੋਈ ਹੈ ਉੱਤੇ ਭਲੇ ਪ੍ਰਤੀਤ ਨਹੀਂ ਦੋ ਇਹ ਆਏ ਖਾਬ ਜੋ ਆਪਤੀ ਹੈ ਉਹਨਾਂ ਨੂੰ ਗੁੱਸਾ ਕਰਾ ਉਹ ਛੱਡ ਦੋ ਕਬਾਰਾ ਜੋਤ ਮਿਲਾਵੈ ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੇ ਮਿਲਿਆ ਕਦੇ ਨਾ ਵਿਛੜੈ ਜਿਹੜਾ ਮਿਲ ਜਾਂਦਾ ਫਿਰ ਥੋੜੀ ਵਿਛੜਦਾ ਕਹਿੰਦੇ ਉਹਨੂੰ ਉਹ ਭਿਲ ਗਿਆ ਜੀ ਉਹ ਗਉੜੇ ਬਰੂ ਚਲੋ ਜੀ ਢੋਕਲੇ ਉਹ ਆਪਣੇ ਘਰ ਨੂੰ ਆ ਗਿਆ ਆਪਣੇ ਘਰ ਨੂੰ ਚਲੇ ਗਿਆ ਵਿਛੜ ਪੈ ਗਿਆ ਮੈਂ ਗਿਆ ਇਸ ਕਰਕੇ ਫਤਿਹ ਲਈ ਛੰਨੇ ਭਗਤ ਨੂੰ ਦਰਸ਼ਨ ਦਿੱਤੇ ਛਕ ਲਿਆ ਉਹ ਆਪਣੇ ਘਰ ਨੂੰ ਚਲੇ ਬੈਠਾ ਰਹਿ ਗਿਆ ਜੇ ਬਿਲਿਆ ਸੀ ਫਿਰ ਵਿਛੜ ਕੇ ਗਿਆ ਮਿਲਿਆ ਕਦੇ ਨਾ ਵਿਛੜਾ ਹੈ ਜੋਤੀ ਜੋਤ ਮਿਲਾਵਾ ਉਹ ਜੋਤੀ ਜੋਤ ਇਕੋ ਹੋ ਜਾਂਦੀ ਹੈ ਦੋਹਾਂ ਦੀ ਔਰ ਅੰਤਰ ਦੋ ਹੋਏ ਨੇ ਨਾਲ ਜਦ ਮਿਲ ਜਾਂਦੇ ਨੇ ਫਿਰ ਇੱਕ ਹੋ ਜਾਂਦੇ ਨੇ ਗੱਲ ਤਾਂ ਹੈ ਜੋਤੀ ਜੋਤ ਮਿਲਾਵਾ ਆਨਕ ਗੁਰਪ੍ਰਸਾਦੀ ਸੋ ਬੁੱਝਸੀ ਜਿਸ ਆਪ ਬੁਝਾਵੇ ਆਨੇ ਕਹਿੰਦਾ ਸਤਗੁਰ ਤੇ ਆ ਜਿਹੜਾ ਗੁਰਪ੍ਰਸਾਦੀ ਗਿਆਨ ਜਿਹੜਾ ਸਾਨੂੰ ਮਿਲ ਰਿਹਾ ਸਾਰੀ ਗੱਲ ਬੁੱਝ ਲੈਂਦਾ ਵੀ ਆ ਕਰਨਾ ਨਹੀਂ ਕਰਨਾ ਕੋ ਜਿਹਦਾ ਹੋਇਆ ਜਿਸ ਆਪ ਬੁਝਾਵਾ ਜਿਹਨੂੰ ਇੱਥੇ ਰੱਖੇ ਸਿਰ ਤੇ ਹੱਥ ਤੇ ਗਾਮ ਸ਼ਬਦ ਵਿਚਾਰ ਕਰਦਾ ਕਰਦਾ ਸਾਰਾ ਗਿਆਨ ਲੈ ਲਵੇ ਰਾਜ ਇਹ ਨਾ ਕਿਤੇ ਪੂਰੇ ਕੁਛ ਕਰਨ ਲੱਗ ਜਿਵੇਂ ਪਰ ਵੀ ਬਹੁਤ ਕਰਨ ਲੱਗ ਜਾਂਦੇ ਨੇ ਰਾਜ ਥੋੜਾ ਜਿਹਾ ਗਿਆਨ ਲੈ ਲਿਆ ਇਹਨਾਂ ਕਾਜਾਂ ਤੇ ਸਤਦਾਰਾਂ ਇਹਨਾਂ ਪੜਿਆ ਰੂ ਸਾਹੀ ਲੱਗੀ ਜਾਤ ਫਾਇਦਾ ਕੇ ਨਾਹੀਂ ठाਉ ਪਰ ਪੰਛੀ ਵੀ ਹੋ ਜਾਂਦੇ ਨੇ ਜਾਂ ਲੋਕ ਥੋੜੇ ਜਿਹਾ ਪੱਥਰ ਟੇਕਣ ਲੱਗ ਜਾਂਦੇ ਨੇ ਬਾਤ ਚੋ ਫਿਰ ਹੋਰੇ ਖੇਡ ਬਣਾ ਲੈਂਦੇ ਉਹ ਬਣਾਉਂਦੇ ਨੇ ਜਿਨ੍ਹਾਂ ਤੇ ਕਿਰਪਾ ਦੀ ਹੁੰਦੀ ਜਿੱਥੇ ਕਿਰਪਾ ਹੁੰਦੀ ਉਹ ਨਹੀਂ ਬਣਾਉਂਦਾ ਉਧਰੋਂ ਬੈਠ जिस आप ਬੁਝਾਵੇ ਤੋਂ ਕੀ ਭਾ ਬਣਦਾ ਜੀ ਆਪ ਕਿਰਪਾ ਰੱਖੇ ਉਹਦੇ ਸਿਰ ਤੇ ਹੱਥ ਰੱਖੇ ਉਹਨੂੰ ਦੂਏ ਪਾਸੇ ਕਿਸੇ ਪਾਸੇ ਜਾਣ ਤੋਂ ਬਚਾ ਲਵੇ ਕਿਸੇ ਹਰ ਕਦੇ ਨਾ ਚੇਤੇਈ ਜਮਕਾਲ ਸਿਰ ਮਾਰੀ ਸਭ ਲੇਖੇ ਵਿੱਚ ਹੈ ਜਿੰਨਾ ਜਿਹੜੇ ਲੇਖਾ ਲਿਖਦਾ ਹੈ ਉਹਦੇ ਵਿੱਚ ਤਾਂ ਸਾਰਾ ਮੂੰਹ ਆਇਆ ਵਿੱਚ ਹੀ ਸਭ ਕੁਝ ਲੇਖੇ ਵਿੱਚ ਹੈ ਮਨਮੁਖ ਕਰੀ ਮਨਮੁਖ ਕਰੀ ਲੇਖੇ ਵਿੱਚ ਹੈ ਹਰ ਨਾਮ ਕਦੇ ਨਾ ਚੇਤੇਈ ਜਮਕਾਲ ਸਿਰ ਮਾਰੀ ਹਰ ਨਾਮ ਨੂੰ ਕਦੇ ਨਹੀਂ ਚੇਤਾ ਕਰਦਾ ਜਿਹੜਾ ਇਹ ਮਨਮੁਖ ਕਰੀ ਉਹ ਕੋਲ ਨੂੰ ਨਹੀਂ ਮੱਸਦਾ ਉਹ ਕੋਈ ਗੱਲੇ ਨਹੀਂ ਕਰਦਾ ਪਰ ਇਹ ਨਜੇਤ ਹੀ ਜੰਪ ਕਾਲ ਸਿਰ ਮਾਰੀ ਇਸੇ ਕਰਕੇ ਤਾਂ ਕਾਲ ਸਿਰ ਚ ਤੇ ਲੱਗਦਾ ਤਾਂ ਹੀ ਦਾ ਮੂੰਹ ਚ ਜੰਪਦਾ ਡੰਡਾ ਖਾਂਦੇ ਨੇ ਸਿਰ ਮਾਰੀ ਅੱਛਾ ਜੀ ਮਨਮੁਖ ਨੂੰ ਦੱਸੀ ਇਸ ਗੱਲ ਨੂੰ ਸਮਝ ਜੀ ਮਨਮੁਖ ਪ੍ਰਚਾਰ ਕਰਦਾ ਇਸ ਗੱਲ ਦਾ ਪਰ ਕਹਿੰਦੀ ਲੇਖਾ ਛੱਡ ਲੇਖੇ ਲੇਖੇ ਦੇ ਵਿੱਚ ਪਾਉਂਦੇ ਲੋਕਾਂ ਨੂੰ ਲੇਖਾ ਕੀ ਹੈ ਜਿਹੜਾ ਪਾਪ ਪੁਰਨਾ ਲਿਖਾ ਪਾਪ ਉਹ ਜੇ ਬੀਜ ਦੇ ਤੇ ਸਭ ਧਰਮ ਗਾਇਕੇ ਜਾਏ ਉਹ ਪਾਪਰ ਦੀ ਗੱਲ ਕਰਦੇ ਨੇ ਲਿਖੇ ਦੀ ਗੱਲ ਕਰਦੇ ਨੇ ਪਾਪ ਦੂ ਭਈ ਕਹਾਵਤ ਉਹ ਨਰਕੁਲ ਸੁਰਗੁ ਵਿਚਲਾਵ ਬਸ ਉਹਨਾਂ ਪਾਪਾ ਤੇਨੂੰ ਕੀ ਫੋਟੇ ਪਾਪਰ ਨੂੰ ਤੇਰੇ ਕੋਈ ਵਸਤੀ ਅੱਛਾ ਕਹਿਣਾ ਚਾਹੁੰਦੇ ਵੀ ਜਿਹੜਾ ਮਨਮੁਖ ਹੈ ਹੰਕਾਰੀ ਆ ਉਹ ਇਸ ਗੱਲ ਦਾ ਪ੍ਰਚਾਰ ਕਰ ਰਿਹਾ ਵੀ ਸਭ ਕੁਝ ਲੇਖੇ ਵਿੱਚ ਹੈ ਜੀ ਹਾਂ ਉਹ ਉਹ ਉਹ ਝੰਡਾ ਵਰਦਾਰਾ ਹੈ ਉਹਦਾ ਅੱਛਾ ਉਹ ਤੁਹਾਨੂੰ ਸਿੱਖ ਪ੍ਰਚਾਰ ਹੈ ਖਾਲਸਾ ਦਾ ਪ੍ਰਚਾਰ ਤਾਂ ਹੋਇਆ ਹੀ ਤੋਂ ਬਾਅਦ ਜੱਟੇ ਬਾਗੀ ਹੋਇਆ ਬੰਦਾ ਬਾਅਦ ਜਦੋਂ ਸ਼ੁਰੂ ਕੀਤਾ ਰਾਜਵਾਲੂ ਰਾਜ ਕਰੇਗਾ ਖਾਲਸਾ ਬਾਹਰਲਾ ਰਾਜ ਜੱਟੇ ਦਾ ਸੁਖਾਲਾ ਚੁਗਰ ਗਿਆ ਵੀਡੀਓ ਦਾ ਪ੍ਰਚਾਰ ਹੈ ਸਾਰਾ ਹਾਂਜੀ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਦੇਖੋ ਲੱਦੇ ਕੀ ਹੈ ਪਾਪ ਲੱਦੇ ਦੇ ਵਿਕਾਰ ਲੱਦੇ ਦੇ ਬਲੂਰ ਕੀ ਬਨੂ ਮਨ ਮਰੂਰ ਹੋ ਗਿਆ ਕੱਚੇ ਰ ਭੈ ਮਰੂਰਾ ਜੇ ਲੋਹਾ ਵੀ ਜਿਹੜਾ ਗਲ ਜਾਂਦਾ ਨਾ ਉਹਨੂੰ ਮਰੂਰ ਕਹਿੰਦੇ ਨੇ ਇਹਦਾ ਸੁੱਧ ਲੋਹਾ ਬਣੀ ਨੇ ਹੁਣ ਨੇ ਤੋਂ ਵੀ ਭੜਾ ਹੋ ਗਿਆ ਬਿਦੂਰ ਸਭ ਲੱਦੇ ਬਹੁ ਭਾਰੀ ਬਹੁਤ ਭਾਰ ਲੱਦਲੇ ਨੇ ਪਾਪਾ ਦੀ ਬੰਡਾ ਪਰਕੇ ਲੱਦਲੀ ਆ ਜਿਹੜਾ ਪੁੱਤ ਪਾਪ ਦੀ ਪਰਣਾ ਲੱਦਲੀਆਂ ਸੱਦੇ ਬਹੁ ਭਾਰੀ ਮਾਰਗ ਬੇਖਬ ਡਰਾਵਣ ਜਿਹੜਾ ਰਸਤਾ ਬੜਾ ਬੇਖਬ ਮੈਂ ਔਖਾ ਹੈ ਡਰਾਉਣਾ ਲੱਗਦਾ ਕਿਉਂ ਤਰੀਏ ਤਾਰੀ ਤਾਰੀ ਤਰੇਗਾ ਕਿਵੇਂ ਭਾਰ ਨਾਲ ਲੱਦੀ ਬੈਠ ਉਹਦੇ ਬਹੁ ਪਰਮ ਸੇ ਪਹਾੜ ਇਹ ਬਹੁਤ ਭਾਰੀ ਭਾਰੀ ਬੰਡਾ ਬੰਨ ਲਿਆ ਤਾਂ ਤਰ ਨਹੀਂ ਸਕਦਾ ਹੁਣ ਤੂੰ ਲੈ ਡੁੱਬ ਜਾਣ ਤੈਨੂੰ ਡੁੱਬਿਆ ਹੋਇਆ ਹੀ ਐ ਦੁਬਿਆਦਾ ਹੋਇਆਈਆ ਤਾਂ ਨਾ ਜੀ ਭਾਰ ਛੱਡੇ ਦੀ ਪਾਰਾਂ ਪੜਨਾ ਬੰਦੀ ਗਿਆ ਦੁਬਿਆਈ ਰਹਿ ਗਿਆ ਹਾਂਜੀ ਨਾਨਕ ਗੁਰ ਰਾਖੇ ਨਾਨਕ ਗੁਰ ਰਾਖੇ ਸੇ ਉਬਰੇ ਦਾਨ ਕਰਨਾ ਨੇ ਰਖਲੇ ਉਪਰੇ ਉਪਰੇ ਨੇ ਡੁੱਬੇ ਤਾਂ ਉਹ ਵੀ ਸੀ ਸਾਰੇ ਸਤਗੁਰ ਉਪਰਤੀ ਉਹਨੇ ਕਰਲੇ ਉੱਤੇ ਨੂੰ ਬਾਹ ਫੜ ਕੇ ਉਹਨੇ ਬਾਹ ਫੜ ਕੇ ਘੜੇ ਰੇ ਪਾਣੀ ਪਕੜ ਕੱਢ ਲਈ ਤੇ ਅਗਿਆਨਤਾ ਦੇ ਅਗਿਆਨਤਾ ਦੇ ਸਾਗਰ ਵਿੱਚ ਡੁੱਬੇ ਹੋਏ। ਹਰਨਾਮ ਉਧਾਰੀ। ਹਰਨਾਮ ਉਧਾਰੀ। ਹਰਨਾਮ ਦੇ ਦਾ ਨਾਟਕ। ਠੀਕ ਹਰਨਾਮ ਜੋ ਹੈ ਇਹ ਆਪਣੇ ਮੂਲ ਦਾ ਹੀ ਗਿਆਨ ਹੈ ਜੀ। ਹਾਂ ਜੀ ਜਿਨ੍ਹਾਂ ਨੂੰ ਮੂਲ ਦਾ ਗਿਆਨ ਦੀ ਸੋਜੀ ਆ ਗਈ ਉਹ ਉੱਭਰ ਗਏ, ਬਾਕੀ ਸਭ ਡੁੱਬ ਗਏ। ਬਾਕੀ ਡੁੱਬੇ ਤਾਂ ਪਹਿਲਾਂ ਹੀ ਸੀ ਉੱਤੇ ਨੂੰ ਆਏ ਹੀ ਨਹੀਂ ਆਏ। ਠੀਕ। ਇਹਦਾ ਬੁੱਢੇ ਭਾਈ ਸਾਰੇ ਵੀ ਡੁੱਬੇ ਆਏ ਭਾਈ ਡੁੱਬੇ ਤਾਂ ਹੈਗੇ ਹੀ ਆ ਸਾਰੇ ਇੱਥੇ 27ਵੀਂ ਪੌੜੀ ਸਮਾਪਤੀ ਹੈ ਜੀ ਹਾਂਜੀ